ਸੋ ਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਿਮਰੰ ਸੋਈ ਹਾਂਜੀ ਪੁਰਖ ਅਚਲ ਅਬਨਾਸੀ ਹੂੰ ਉਹ ਜਿਹੜਾ ਉਹਨੂੰ ਸੁਣ ਲੋ ਹਾਂ ਉਹਦੇ ਜਦੋਂ ਆ ਜਿਹਦੇ ਸਬੰਧ ਵਾਲਾ ਹੂੰ ਜਿਸ ਸਿਬਰਾ ਦਾ ਦਰਬਤ ਮਹੰਮਦ ਹੂੰ ਇਹ ਉਹ ਪਨਾਹੀ ਅਜਲਪੁਰ ਖੂ ਰੂ ਸਿਬਰਿਆ ਜਿਹਦੇ ਸਬੰਧ ਕਰਕੇ ਮੇਰੀ ਦਰਬੰਦੀ ਬੜਾ ਖਤਮ ਹੋ ਵੀਦਸ ਗਈ ਉਹਨਾਂ ਜਿਹੜੇ ਲੋਕ ਸਬੰਧ ਕਰਦੇ ਨੇ ਹੋਰ ਵੀ ਤਾਂ ਕਰਦੇ ਨੇ ਉਹਾਂ ਦੀ ਦੁਰਵਰਦੀ ਨਾਲ ਛੁੱਟੀ ਰਸੀ ਪੱਟਦੀ ਕਿਉਂ ਸਵਾਲ ਇਹ ਹੈ ਜੇ ਤਾਂ ਕਰ ਲੈਂਦੇ ਜਿਵੇਂ ਉਹਨੇ ਸਪੱਸ਼ਟ ਤਰੀਕਾ ਅਡਾਪਟ ਕਰ ਲੈਂਦੇ ਫੇਰ ਤਾਂ ਜਾਂਦੀ ਮੈਲ ਦੂਰ ਹੋ ਦੱਸ ਜਾਂਦੀ। ਤਰੀਕਾ ਉਹਨਾਂ ਨੇ ਗੁਰਮਤ ਵਾਲਾ ਜੋ ਪੱਟਦੇ ਦੱਸਿਆ ਉਹਦੀ ਅਪਣਾਇਆ ਤਾਂ ਵੀ ਬੈਣ ਨਹੀਂ ਸੀ। ਉਹ ਜਿਹੋਰ ਤਰੀਕਾ ਹੈ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਫਰਕ ਹੈ ਹਾਂ ਹਾਂ ਕਹਿੰਦਾ ਦਵਾਈ galtਾ ਹੈ ਜਾਂ ਫਿਰ ਪਰਹੇਜ਼ ਦੀ ਰੱਖਿਆ ਠੀਕ ਹੈ। ਕਮੀ ਹੈ। ਕਮੀ ਹੈ। ਹਜਮ ਕਰਨ ਦੀ ਕਮੀ ਹੈ। ਕਹੇ ਹੁਣ ਆਪਣੀ ਆਪਣੀ ਸਾਰਿਆਂ ਨੂੰ ਦੇਖਣੀ ਪੱਟ ਦੀ ਗੱਲ ਸਮਝ ਲੈਣੀ ਆ ਤੇ ਆਪਣੇ ਕਿਉਂ ਨਹੀਂ ਅਸਰ ਹੋਇਆ ਇਹ ਅਸੀਂ ਦੇਖਣਾ ਆਪ ਠੀਕ ਹੈ ਜੀ ਅਰਥਾਂ ਚ ਜਿਹਨੇ ਲਾਭ ਉਠਾਉਣਾ ਉਠਾ ਮਰਜੀ ਹੈ ਸਾਰੇ ਲੱਗੇ ਹੋਏ ਨੇ ਕਹਿੰਦੇ ਨੇ ਅਸੀਂ ਕਰਦੇ ਹਾਂ ਸਤ ਵੀ ਲੱਗੇ ਹੋਏ ਨੇ ਉੱਪਰ ਵੀ ਬਹੁਤ ਨੇ ਸਿੱਖ ਵੀ ਨੇ ਸਾਰੇ ਲੱਗੇ ਹੀ ਹੋਏ ਠੀਕ ਸਤਗੁਰ ਚਰਨ ਕਮਲ ਰਿਧ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਕੋਰਾਂ ਅਜਾ ਨਾ ਕੀ ਕੀਤਾ ਦੇ ਚਰਨ ਜਲਦੇ ਜੀ ਧਾਲਦੇ ਸੀ ਹੂੰ ਹੂੰ ਸਤਗੁਰ ਦੇ ਚਰਨ ਹੁੰਦੇ ਜਿਹੜੇ ਗੁਣ ਲਿਖੇ ਹੋਏ ਗੁਰਬੰਧਰ ਵਿੱਚ ਹੂੰ ਚਾਰ ਗੁਣ ਜਿਹੜੇ ਪਿਛਲੇ ਨੇ ਚਾਰ ਤਾਂ ਹੈਗੇ ਨੇ ਸਾਰੇ ਅੱਛਾ ਜੀ ਉਹਦਾ ਤਾਂ ਕੋਈ ਲੋ ਉਹਦਾ ਵੀ ਨੇ ਅੱਛਾ ਜੀ ਕੋਣ ਨਾਲੇ ਕੋਣ ਖਰਾਬ ਤੇ ਸਾਡੇ ਹੂੰ ਹੂੰ ਤੇਰੇ ਬਾਲ ਨਹੀਂ ਅਸੀਂ ਰਹਿ ਬਰੋਚ ਫਸੇ ਹੋਏ ਹਾਂ ਹੂੰ ਕਰਬੋਜ ਫਗੜਿਆ ਇੱਕ ਸਾਡੀ ਅਜੂਦੀ ਨਹੀਂ ਰਹਾ ਹੋਏ ਅਸੀਂ ਸਰੀਰ ਬਲੁਖਾ ਹੂੰ ਹੂੰ ਅਜੋਨੇ ਅਸੀਂ ਹੁਣ ਨਵਾਂ ਬਾਹਰ ਸ਼ਰੀਰ ਸਾਨੂੰ ਚਾਹੀਦਾ ਹੈ ਜਨਮ ਪਦਾਰਥ ਖੱਟ ਅਸੀਂ ਚਾਹੀਦਾ ਸਾਨੂੰ ਇੱਥੇ ਜਨਮ ਪਦਾਰਥ ਲੈਣ ਆਏ ਹੋਏ ਹਾਂ ਠੀਕ ਹੈ ਜਨਮ ਪਦਾਰਥ ਇਹ ਹੋ ਜਾਂਦੇ ਵੱਲੋਂ ਹੁਣ ਬਿਲਕੁਲ ਨਹੀਂ ਹੋ ਸਕਣ ਜਿੰਨਾ ਜਰ ਕਾਮਨਾਵਾਂ ਨੇ ਕਾਮ ਕਰੋਦਾ ਨਾ ਜਬੀ ਨਿਰਵੈਰ ਨਹੀਂ ਹੋ ਸਕਦੇ ਨਿਰਵੈਰ ਵੀ ਅਸੀਂ ਹੁਣ ਵੈਰ-ਵਿਰੋਧ ਫਸੇ ਹੋਇਆ ਠੀਕ ਹੈ ਕਾਮਨਾ ਕਰੋਦਾ ਹੈ ਵੈਰ-ਵਿਰੋਧ ਬਧੋਵਣ ਵਾਲੇ ਨੇ ਜਿਸ ਕਰਕੇ ਕਾਮਨਾ ਅਹਰੀਂ ਭਗਵੰਤ ਨਹੀਂ ਪਾਇਆ ਜਾ ਸਕਦਾ ਕਾਮਨਾ ਅਹਰੀਂ ਕਿਵੇਂ ਪਾਵੇ ਭਗਵੰਤ ਕੋ ਇਹਦਾ ਹੈਗਾ ਪਰਹੇਜ ਠੀਕ ਹੈ ਜੀ ਜੇ ਦਵੈਰ ਹੋਣਾ ਹੋਣ ਵਾਸਤੇ ਸਾਨੂੰ ਕਾਮ ਕ੍ਰੋਧ ਝੱਲਣਾ ਪੈਂਦਾ ਹੂੰ ਕਉਂ ਕਾਮ ਕ੍ਰੋਧ ਜਿਹੜਾ ਹੈ ਜਿਹੜਾ ਸਾਡਾ ਮੇਰਾ ਕਾਲੀ ਸਰੀਰ ਕਾਇਆ ਹੈ ਕਾਮ ਕ੍ਰੋਧ ਪੈਦਾ ਹੋਣ ਦਿੰਦਾ ਕਾਮ ਕ੍ਰੋਧੇ ਨੂੰ ਛੱਡਣਾ ਪਊਗਾ ਤਾਂ ਮੇਰਾ ਸਾਨੂੰ ਅਸ਼ੁੱਧ ਕੱਲੇ ਕੱਲੇ ਦੀ ਗੱਲ ਦਸੀ ਹੋਈ ਆ ਗੁਰਮਾਨੀ ਚ ਲੋੜ ਹੈ ਸਮਝਣ ਦੀ ਲੋੜ ਹੈ ਸਮਝ ਕੇ ਕਮਾਉਣ ਦੀ ਠੀਕ ਹੈ ਜੀ ਜੇ ਨਾ ਜਦ ਰਵੈ ਦੀ ਨਹੀਂ ਹੋ ਸਕਦੇ ਕਾਇਆ ਵਾਲਾ ਸਰੀਰ ਪੂਰ ਨਹੀਂ ਹੋ ਸਕਦਾ ਉਹ ਗਾਲਦਾ ਰਹੂਗਾ ਕਾ ਗਰੋਧ ਗਾਲਦਾ ਰਹੂ ਹੂੰ ਹੂੰ ਕਿਉਂ ਖਾਚ ਢਾਲੇ ਦਾ ਬਸਾ ਲੈਗਾ ਜੀ ਹਾਂ ਗੁਰੂ ਰਾਮਦਾਸ ਘਰ ਸਗਲ ਮਨੋਰਥ ਪੂਰੀ ਆਸਾ ਸਰੀਰ ਕਰਕੇ ਹੀ ਸਾਡਾ ਇਹ ਕਾਬਲ ਹੋਦੇ ਹਾਂ ਆਵਾ ਸਰੀਰ ਕਰਦੇ ਨੇ ਸਰੀਰ ਕਰਕੇ ਸਾਡਾ ਬੈਰ ਵਿਰੋਧ ਹੈ ਬਾਹਰਲੇ ਸਰੀਰ ਕਰਕੇ ਹੂੰ ਛੁੱਟੇ ਜੇ ਵੀ ਛੁੱਟੇ ਤਾਂ ਚਾਹੀਏ ਅਜੋਨੀ ਨਹੀਂ ਹੈਗੇ ਅਸੀਂ ਅਕਾਲ ਮੂਰਤ ਜੇ ਜਨ ਜਾਂ ਚਰ ਸ਼ੁਰੂ ਨਹੀਂ ਦਾ ਅਕਾਲ ਮੂਰਤ ਬਣੀ ਜੇ ਕਾਇਆ ਪੂਰੀ ਹੋ ਗਈ ਸਾਨੂੰ ਰਹਿੰਦੀ ਆ ਹਰ ਵਕਤ ਚਿੰਤਾ ਸਾਡੇ ਵਾਦੇ ਦੀ ਜਿੰਨਾ ਚਿਰ ਅਸੀਂ ਹੁਕਮ ਚ ਨਹੀਂ ਹੁੰਦੇ ਤਾਂ ਇਹ ਦੂਰ ਹੋ ਸਕਦੀ ਉਹ ਤੇ ਵੰਨਾਲਾ ਇਕ ਗੱਲ ਐ ਅੱਛਾ ਜੀ ਪਰ ਵੀ ਜਨਾ ਚਲਾ ਉਹਨਾਂ ਨੂੰ ਜਦੀ ਹੋ ਸਕਦਾ ਉਹ ਅਲੱਗ ਗੱਲ ਐ ਸਾਰੇ ਇਸੇ ਗੱਲ ਹਮ ਹਮ ਜੇਰ ਵੀ ਹੁਣ ਅਖਾਲਪੂਰ ਤੋਂ ਉਹਨੇ ਜੁੜੀ ਉਹਨੇ ਤਿੰਨ ਤੋਂ ਵੀ ਸਾਡੇ ਜੀ ਤਿੰਨ ਘੰਟੇ ਦਾ ਹਲਣ ਕਰ ਲੈ ਗੱਲ ਖਤਮ ਹੋ ਗਈ ਉਥਾ ਦਾ ਰਹਿਣਾ ਹੀ ਸਾਡੇ ਕੋਲ ਉਹ ਜਿਹੜਾ ਸਰਪੰਚ ਇਹਦਾ ਵੀ ਕੋਈ ਰੌਲਾ ਇਹਦਾ ਰਹਿਣਾ ਹੀ ਹੈ ਇਹਦਾ ਇਸਤੇਮਾਲ ਨਹੀਂ ਕਰਨਾ ਪਾਵਰ ਅਜੇ ਇਹ ਤਾਂ ਬਚਣਾ ਹੈ ਇਹ ਕੋਣ ਸਾਡੇ ਕੋਲ ਹੈਗਾ ਇਹ ਉਪਕਰਨ ਅਸਲੀ ਗੋਲ ਨਹੀਂ ਹੈ ਅੱਛਾ ਇਹ ਉਪਕਰਨ ਇਹਦਾ ਅਸੀਂ ਤਿਆਗ ਕਰਦੇ ਇਹ ਪਾਵਰ ਬਰ ਕੋਲੇ ਦਾ ਇਸਤੇਮਾਲ ਨਹੀਂ ਕਰਨਾ ਖਤਰਨਾਕ ਹੈ ਹੂੰ ਹੂੰ ਵਿਰੋਧ ਇਸ ਪਾਵਰ ਨਾਲੇ ਮਾਨਸਿਕਤਾ ਦਾ ਵਿਰੋਧ ਕਰਦਾ ਜਿਹੜਾ ਬਾਪ ਨਾਲ ਝਗੜਦਾ ਨਾ ਪੁੱਤ ਇਹਦੇ ਕੋਈ ਪਾਵਰ ਹੈ ਜਿਹੜੜ ਦੇ। ਹੂੰ। ਆਹ। ਕਾਹ ਹੈ ਝਗੜ ਤੇ ਪੂਤ ਸੰਗ ਬਾਪ। ਹੂੰ। ਓਏ ਕੋਈ ਸਹੇਬਾਂ ਮੈਂ ਇਹਦੇ ਕੋਈ ਸ਼ਕਤੀ ਹੈ। ਇਹਦਾ ਇਸਤੇਮਾਲ ਨਹੀਂ ਕਰਨਾ। ਇਹ ਤਾਂ ਹੈਗੀ ਆ ਸ਼ਕਤੀ ਆ ਉਹ ਇਹਦਾ ਤਾਂ ਇਦਾਂ ਹੀ ਆ ਬਸ। ਠੀਕ ਹੈ। ਘਾੜੇ ਕੋ ਹੈ ਨਹੀਂ ਗੇ ਕੋਣ ਉਹ ਅਸੀਂ ਧਾਰਨ ਕਰਨੇ। ਬਾਕੀ ਸਾਡੇ ਕੋ ਹੈਗਾ ਬਾਕੀ ਚਾਰੇ ਹੈਗੇ ਨੇ। ਨਾਮ ਹੈ ਕਰਤਾਪੁਰਖ ਵੀ ਹੈ ਜੀ ਸਮਝ ਆਣੀ ਹਾਂਜੀ ਆਓ ਬਾਕੀ ਹੈਗਾ ਹੈ ਠੀਕ ਹੈ ਇੱਕ ਕਾਰ ਵੀ ਹੈ ਅੱਗੇ ਨਹੀਂ ਕੋਈ ਸੜਕ ਐ ਤਿੰਨੇ ਦੀ ਕੋਈ ਨਹੀਂ ਹੂੰ ਆ ਤਿੰਨੇ ਹੋ ਗਏ ਮਾ ਜੋ ਤਨੇ ਇਹਦੇ ਪੂਰੇ ਕੋਣ ਹੋ ਜਾਣਗੇ ਹਾਂਜੀ ਸਤਗੁਰ ਚਰਨ ਕਮਲ ਰਿਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਆ ਗੱਲ ਸਤਗੁਰ ਦੇ ਕਿੰਨੇ ਖੁਣ ਲਿ ਚੜ ਦੇ ਤਾਰਨ ਕਰ ਲੈ ਇਹਨੇ ਦੇ ਅਰਜਨ ਨੇ ਕਰ ਲੈ ਸੀ ਗੁਰ ਅਰਜਨ ਗੁਣ ਸਹਿਜ ਵਿਚਾਰਨ ਗੁਰ ਅਰਜਨ ਵਾਲੇ ਗੁਣ ਸਹਿਜ ਅਵਸਥਾ ਦੇ ਵਿੱਚ ਹੋ ਕੇ ਤੁਸੀਂ ਵਿਚਾਰ ਮੈਂ ਵਿਚਾਰੇ ਨੇ ਆਪਣੀ ਗੱਲ ਕਰ ਰਿਹਾ ਆ ਮਾ ਕੀਤਾ ਜੇਬੁਰ ਜੇਬੁਰ ਕੀਤਾ ਸੋਈਪੁਰ ਕਾ ਆ ਜਿਹੜਾ ਗੁਰੂ ਜੇ ਉਹ ਵਿਚਾਰੇ ਨੇ ਹਾਂ ਹਾਂਜੀ ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਏ ਜੇ ਕੋਲ ਨੇ ਨਾ ਇਹ ਵਿਚਾਰਨ ਕਰਕੇ ਹੀ ਗੁਰੂ ਰਾਮਦਾਸ ਦੇ ਘਰ ਪ੍ਰਗਟ ਹੋਇਆ ਸੀ ਗੁਰੂ ਰਾਮਦਾਸ ਦੇ ਵੀ ਪ੍ਰਕਾਸ਼ਤਾ ਹੀ ਹੋਇਆ ਸੀ ਇਹਨੂੰ ਕੋਲ ਦੀ ਵਜ੍ਹਾ ਨਾਲੇ ਜਾਣਨ ਕੋਣ ਵਿਚਾਰੇ ਗਿਆਨੀ ਸੋਏ ਤੇ ਕੋਣ ਗੁਰੂ ਵਿਚਾਰੇ ਨੇ ਹਾਂਜੀ ਵਿਚਾਰੇ ਵਿਚਾਰੇ ਨੇ ਕਿਹਨੂੰ ਕੋਣ ਵਿਚਾਰੇ ਗਿਆਨੀ ਸੋਏ ਗੁਰੂ ਕੋ ਗਿਆਨ ਪ੍ਰਾਪਤ ਹੋਏ ਔਰ RAMDAS ਨੇ ਵੀ ਇਹੀ ਕੰਮ ਕੀਤਾ ਸੀ ਉਹਨਾਂ ਦੇ ਵੀ ਇਹ ਵੀ ਪ੍ਰਗਟ ਹੋਇਆ ਸੀ। ਹੂੰ ਘਰ ਕੀ ਪੈਦਾ ਹੋ ਗਿਆ। ਹੂੰ ਦਾ ਘਰ ਆਪਣੇ ਵਿੱਚ ਘਰ ਹੁੰਦਾ ਸਾਰਿਆਂ ਦਾ। ਅੱਛਾ। ਔਰ ਅਕਲਦੇਵ ਦਾ ਘਰ ਆਪਣਾ। ਹੂੰ ਘਰ ਨੂੰ ਕੁਰਬਾਨੀ ਦੀ ਘਰ ਵੰਦਦੀ ਹੈ। ਹੂੰ ਘਰ ਵਸਾ ਹੋਏ ਲਿਖਿਆ ਹੋਇਆ ਆਡੇ ਕੋਈ ਹੋਰ ਹੈ ਬਾਲ ਨੇ ਅਰਥ ਉਹ ਤਾਂ ਇਹਨਾਂ ਦੇ ਜਿਹੜੇ ਵਿਦਵਾਨਾਂ ਦੇ ਅਰਥ ਨੇ ਠੀਕ ਹੈ ਜੀ ਬਾਹਰ ਦਾ ਸੀ ਘਰ ਬੰਦੇ ਹੀ ਸੀ ਜੋਤ ਦਾ ਵਿੱਚ ਹੈ ਸਾਡਾ ਪ੍ਰਕਾਸ਼ਾ ਹੋਇਆ ਉਹਦਾ ਅਵਦਾਸ ਦੇ ਹੂੰ ਇਹਨਾਂ ਗੁਣਾ ਨਹੀਂ ਕੀਤਾ ਸੀ ਗੁਣਾ ਦੀ ਵਿਚਾਰ ਨਾਲ ਅਵਦਾਸ ਦੇ ਪ੍ਰਕਾਸ਼ਾ ਹੋਇਆ ਸੀ ਉਸੇ ਦਾ ਮੇਰੇ ਹੋਇਆ ਉਸੇ ਦਾ ਦਰਜਨ ਦੇਵਦੇ ਹੋਇਆ ਹਾਂਜੀ ਸਗਲ ਮਨੋਰਥ ਪੂਰੀ ਆਸਾ ਸਗਲ ਮਨੋਰਥ ਪੂਰੀ ਆਸਾ ਪੂਰੀ ਹੋਗੀ ਕਾਦੀ ਸਗਲ ਮਨੋਰਥ ਪੂਰੇ ਹੋਗੇ ਆਸਾ ਪੂਰੀ ਹੋਗੀ ਕਾਦੇ ਨਾ ਹੋਗੀ ਰਾਮਦਾਸ ਦੇ ਅਜੇ ਤਾਂ ਜਨਮ ਨਾ ਹੋਗੀ ਕਿਵੇਂ ਹੋ ਜਾਂਦੀ ਇੱਕ ਬੱਚਾ ਪੈਦਾ ਹੋਣਾ ਕਿਵੇਂ ਹੋ ਪੂਰੀ ਆਸ ਕੀ ਪਹਿਲਾਂ ਅਸਲ ਉਹਨਾਂ ਦੀ ਪੂਰੀ ਨਹੀਂ ਸੀ ਕੋਈ ਉਹਨਾਂ ਦਾ ਮਨੋਰਥ ਰਹਿਦਾ ਸੀ ਅਰਜਨ ਦੇ ਜਨਮ ਤੋਂ ਗੁਰੂ ਆਮਦਾਰ ਦੇ ਅਰਜਨ ਦੇਵ ਦੇ ਜਨਮ ਤੋਂ ਪਹਿਲਾਂ ਕੋਈ ਬਨੋਰਥ ਨਹੀਂ ਸੀ ਪੂਰਾ ਹੋਇਆ ਕੋਈ ਆਸਾ ਰਹੀ ਨਹੀਂ ਸੀ ਹਾਂਜੀ ਉਹ ਤਾਂ ਆਲਰੇਡੀ ਗੁਰੂ ਸੀ ਪਹਿਲਾਂ ਹੀ ਇਹ ਗੱਲ ਅਸੀਂ ਕਿ ਕਹਿ ਸਕਦੇ ਆਂ ਇਸ ਅਧਾਰ ਤੇ ਕਹਿ ਸਕਦੇ ਆਂ ਜਿਹੜੇ ਲੋਕ ਮਾਇਆ 'ਚ ਖੜੇ ਨੇ ਨਾ ਉਹਨਾਂ ਦੀ ਦਸ਼ੀ ਇੱਥੇ ਕਿਉਂ ਇਹ ਜੀ ਅਰ ਅਲਰੇਡੀ ਦੋ ਮੁੱਦੇ ਵੀ ਨੇ ਤੇ ਬੜੇ ਉਹ ਜਿਹੜੇ ਤੋਂ ਪਹਿਲਾਂ ਦੋ ਭਾਈ ਦੇ ਉਹਨਾਂ ਦੇ ਉਹਨਾਂ ਨਾਲ ਮਰੋੜਤ ਆ ਰਿਹਾ ਸਭ ਧੀਓਣੀ ਹੋਇਆ ਦਾ ਮਤਲਬ ਹੈ ਹੂੰ ਅਰਥ ਕਰ ਲੈ ਅਰਜ਼ ਕੀਤੇ ਕੀ ਵੈਸੇ ਜੋ ਮੈਂ ਕਹਣਾ ਇਹੀ ਕੀਤਾ ਹੋਰ ਕੀ ਕੀਤਾ ਨੂੰ ਹੂੰ ਥੋੜੇ ਅਰਥ ਹੋਣੇ ਨੇ ਜਿੱਤੇ ਹੋਏ ਤੇ ਹਾਂਜੀ ਉਹ ਕਹਿੰਦੇ ਜੀ ਇਹ ਗੁਰੂ ਅਰਜਨ ਕਾ ਕਲ ਕਵੀ ਹੱਥ ਆਪ ਦੀ ਸਿਫਤ ਉਚਾਰਦਾ ਹੈ ਆਪਨੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਜਨਮ ਲਿਆ ਤੇ ਸਾਰੇ ਮਨੋਰਥ ਪਾਸਾ ਪੂਰੀਆਂ ਹੋਈਆਂ ਫਿਰ ਇਹਦਾ ਬਹਾਲਾਕਾਰ ਹੋ ਗਿਆ ਹਾਂ ਅਸਾਂ ਪਹਿਲਾ ਪਹਿਲਾ ਅਧੂਰੀਆਂ ਸੀ ਅਸਾਂ ਸਵਾਲ ਇਹ ਹੈ ਪਾਣੀ ਉਚਾਰ ਵੀ ਕਰ ਰਿਹਾ ਉਹਦੇ ਵਾਸਤੇ ਇਹ ਕਹਿਣਾ ਕਿ ਉਹਦੀਆਂ ਆਸਾਂ ਪੁੱਤਰ ਦੇ ਜਨਮ ਤੋਂ ਪੂਰੀਆਂ ਹੋਈਆਂ ਨੇ ਹਾਂਜੀ ਜਦ ਕਹ ਗੁਰਬਾਣੀ ਕਹਿੰਦੀ ਹੈ ਪੁੱਤੀ ਗਲਨ ਪਵੇ ਸੰਸਾਰ ਹਾਂਜੀ ਪੁੱਤਾ ਨਾ ਤਾਂ ਸੰਸਾਰ ਗੁਰਬਾਣੀ ਦੇ ਆਸ਼ੇ ਦਾ ਹੀ ਖਲਾਸ ਅਰਥ ਸਾਰੀ ਲੋਕਾਂ ਦੇ ਅਰਥ ਨੇ ਇਹ ਤੋਂ ਪਤਾ ਲੱਗਦਾ ਸਾਰੇ ਲੋਕ ਸਾਰੀ ਦੇ ਗੁਰਬਾਣੀ ਦਾ ਇਹਨਾਂ ਨੂੰ ਗੁਰਬਾਣੀ ਵਾਲੇ ਬਾਜ਼ਾਰ ਰਾਏ ਵੀ ਗਏ ਅਜੋ ਉਹ ਗੁਰਬਾਣੀ ਦਾ ਜਨਮ ਕੂੜੇ ਦਾ ਵੀ ਪਤਾ ਨਹੀਂ ਲੱਗਿਆ ਹਾਂਜੀ ਅੰਥਾਰੀ ਨੇ ਉਹ ਦੋ ਭਾਈ ਪਹਿਲਾਂ ਵੱਡੇ ਠੀਕ ਹੈ ਜੀ ਜਨਮ ਤੋਂ ਪਹਿਲਾਂ ਹੋਏ ਦੇ ਹੂੰ ਉਹਦਾ ਹੈ ਜੇ ਨਾ ਠੀਕ ਹੈ ਜੀ ਉਹ ਕਿਹੜੀ ਆਸ ਦੀ ਜਿਹੜੀ ਰਹਿ ਗਈ ਸੀ ਉਹਨਾਂ ਦੀ ਇਹਨਾਂ ਦੇ ਜਨਮ ਤੇ ਆਸ ਕੋ ਪੂਰੀ ਹੋਈ ਪਹਿਲਾਂ ਤੋਂ ਹੀ ਹੂੰ ਪਹਿਲਾਂ ਕਿਹੜਾ ਬਹੋਰਤ ਰਹਿੰਦਾ ਸੀ ਹੂੰ ਅਜੀਬ ਗੱਲ ਹੈ ਊਟ ਪਟਾਮ ਕਰਕੇ ਅਰਥ ਭਾਰੇ ਚੱਕ ਕੇ ਹਾਂਜੀ ਗੁਰ ਇਹ ਗੱਲਾਂ ਦਾ ਇਹਦਾ ਸੰਸਾਰਿਕ ਅੰਤ ਹੋ ਗਈ ਫਿਰ ਕੀ ਬਰਮ ਗਿਆ ਆਤਮ ਗਿਆ ਨਾ ਕਿ ਸਮੁੰਦਰ ਆ ਇਸ ਗੱਲ ਦਾ ਕੋਈ ਨਹੀਂ ਹਾਂ ਪੂਜੈ ਨਹੀਂ ਕੀਤੀ। ਉਹ ਲੋਕ ਕਹਿੰਦੇ ਗੀਤ ਆਏ ਤਾਂ ਬ੍ਰੰਭਜਾਰ ਉਹ ਬ੍ਰੰਭਜਾਰ ਛੱਡ ਕੇ ਗੀਤ ਬਣਾਤਾ ਚੱਕੇ ਹੁੰਦੇ। ਹੂੰ। ਕੁਰਬਾਨੀ ਨੂੰ ਕਿੰਨੇ ਘੱਟਿਆ ਲੈਵਲ ਤੇ ਲਿਆ ਸੀ ਅਰਥਾਤ ਇਹਨਾਂ ਸਾਡੇ ਕੋਲ ਅਸੀਂ ਇਹੀ ਬਗਾਇਆ ਅਰਦਾਸਾ ਸ਼ਹੀ ਬਗਾਇਆ ਹੁਣ। ਅੰਤਰਕਾਹੀ ਕਸੂਰ ਹੈ। ਹੂੰ। ਜੋ ਸੀ ਸੰਸਾਰ ਨੂੰ ਦੱਸਾਂ ਉਹ ਹੀ ਹੋ। ਸੰਸਾਰ ਦੀ। ਹੂੰ ਜੇ ਪੁੱਤੀ ਗੱਡ ਬਵੇ ਸੰਸਾਰ ਦਾ ਤਸਦੀਕ ਆਏ ਭਾਈ ਜੇ ਦੁਦਰੇ ਸੰਸਾਰ ਨਾਲ ਜੁੜੇ ਰਹਿ ਜਾਓਗੇ ਉਹ ਬਹਿ ਜਾਊਗਾ ਉਹ ਦਰਬਾਰ ਨਾਲ ਗੱਲ ਨਹੀਂ ਆ ਸਿਫਤੀ ਗੱਡ ਬਵੇ ਦਰਬਾਰ ਸਿਫਤ ਕਰ ਕਹੋ ਕਿਹਨਾਂ ਸਿਫਤ ਜਾ ਬਖਸ਼ ਇਹ ਬਖਸ਼ੇ ਸਤ ਸਲਾਨ ਆਨਕ ਪਾਸ਼ਾਹੀ ਪਾਸ਼ਾ ਉਹ ਜੇ ਸਰ ਜਲਾਵਾ ਜ਼ੁਬਾਸ਼ਾ ਨਾ ਪਾਸ਼ਾ ਬਣਾ ਦੂ ਫੇਰ ਕਿਹੜੀ ਅਸਰੇ ਚ ਫਲੋਰਤ ਰਹਿ ਜਾਊ ਤੁਸ ਦੱਸੋ ਠੀਕ ਸੀ ਜਿਨ੍ਹਾਂ ਨੇ ਅਰਥ ਕੀਤੇ ਨੇ ਮਾਇਆ ਚ ਡਕੋ ਨਾ ਘਟੂਪੇ ਹੋਈ ਸੀ ਉਹ ਸਾਨੂੰ ਅਰਥ ਪੜਾਉਂਦੇ ਹੂੰ ਸਾਡਾ ਕੀ ਹਾਲ ਹੋਣਾ ਸੀ ਅਗਰ ਸੰਗਤਾ ਉਹੀ ਆਣੋਂ ਸੀ ਜੋ ਕੋਈ ਸਕੱਤ ਨੂੰ ਦੱਸਿਆ ਗਿਆ ਦਿੱਤਾ ਗਿਆ ਗੁਰਦਵਾਰਿਆਂ ਚ ਕੋਈ ਨਹੀਂ ਇਹ ਸਾਡੇ ਹੈਡ ਹੋਟੀ ਬੋਲਦੀ ਉਤੋਂ ਦਰਬਾਰ ਸਾਹਿਬ ਦੀ ਬੋਲ ਪੰਥ ਰਤਨ ਦਾ ਖਿਤਾਬ ਦਿੱਤਾ ਹੋਇਆ ਹਾਂ ਕੇ ਰੱਖਦੀ ਸਾਰੀ ਸੰਗਤ ਡਬੋ ਕੇ ਹਾਂ ਪ੍ਰਚਾਰ ਡਬੋਣ ਦਾ ਜ਼ਿੰਮੇਵਾਰ ਜਿਹੜੇ ਕੋ ਜਾਣਦੇ ਤੇ ਘੋਡੇ ਲੈਣ ਲਾਇਏ ਹੋਤੇ ਉਹ ਕੋਈ ਨਹੀਂ ਆ ਕਿ ਕੋਈ ਨੇ ਇਹਨੂੰ ਕੋਈ ਦੀ ਭਾਜੀ ਪੁੱਛ ਲੈਣ ਦੋ ਦੇਖ ਲੈਣ ਦੋ ਆ ਭਾਈ ਹਰੇ ਤੋਂ ਥੱਕ ਲੈਣ ਦੋ ਭਾਈ ਸਾਡੀ ਗੱਲ ਇਹਨਾਂ ਨਾਲ ਥੋੜੀ ਦੀ ਹੂੰ ਹੂੰ ਹੁਣ ਵੀ ਰਾਜੀ ਨਹੀਂ ਸਾਲੇ ਕੋਈ ਗੱਲ ਸੁਣੂਗਾ ਹੂੰ ਜਿਹੜੇ ਆਦਿਕ ਅਰਵੀ ਦਿੱਤੇ ਸਾਰਿਆਂ ਨੇ ਕਿਹੜਾ ਮੰਨ ਲੈਣੇ ਨੇ ਸਾਰਿਆਂ ਨੂੰ ਕਿਹੜਾ ਫਿੱਟ ਨੇ ਇਹ ਤਾਂ ਕਿਸੇ ਬਿਰਲੇ ਨੂੰ ਫਟਾਉਂਦੇ ਹੁੰਦੇ ਗੁਰੂ ਅਰਜਨ ਦੇ ਦੋ ਵੱਡੇ ਭਰਾ ਦੇ ਉਹਨਾਂ ਨੂੰ ਵੀ ਫਿੱਟਾ ਯਾਰ ਤੇ ਕੁਰਬਾਨੀ ਹੂੰ ਹੂੰ ਉਹਨਾਂ ਨੂੰ ਆਇਆ ਵੀ ਬਟ ਗੁਰੂ ਅਰਜਨ ਨੂੰ ਆਗੇ ਠੀਕ ਹੈ ਆ ਸਾਰਿਆਂ ਨੂੰ ਨਹੀਂ ਗੁਰੂ ਘਰ ਜਿਹੜਾ ਸਾਰਿਆਂ ਨੂੰ ਆਗੇ ਇਹਦਾ ਬਸ ਐਸੇ ਖੇਡਦਾ ਹੂੰ ਹੂੰ ਆਹ ਗੁਰਮਤ ਬ੍ਰਹਮ ਆ ਦੇਖੋ ਉਹ ਜਿਹੜਾ ਅਸਲਾ ਲੀਏ ਤਾਂ ਜਨਮ ਦੇਦੇ ਨੇ ਗੁਰਮਤ ਅਤਿ ਬ੍ਰਹਮ ਪਛਾਣ ਲਿਆ ਹੂੰ ਇਹ ਤਾਂ ਮੈਂ ਹੋ ਗਿਆ ਬਿਨੋਂ ਫਿਰ ਤਾਂ ਸਾਰੀ ਗੁਰਬਾਣੀ ਗਲਤ ਹੋ ਗਈ ਹੂੰ ਆ ਜਨਮ ਤੇ ਜਨਮ ਹੋਇਆ ਤੇਰਾ ਸੰਸਾਰੀ ਜਨਮ ਦੀ ਗੱਲ ਨਹੀਂ ਹੈ ਇਹ ਜਨਮ ਪਦਾਰਥ ਹੋਇਆ ਇਹਨੂੰ ਮਿਲਿਆ ਤਾਂ ਨੂੰ ਪਦਾਰਥ ਮਿਲਿਆ ਤਾਂ ਗੁਰਮਤ ਬ੍ਰਹਮ ਨੂੰ ਪਛਾਣ ਲਿਆ ਗੁਰਮਤ ਗੁਰਮਤ ਦੇ ਕੋਈ ਇੱਕ ਬ੍ਰਹਮ ਨੂੰ ਮੁਖਾ ਨਾ ਇੱਕ ਬ੍ਰਹਮ ਗੁਰਮਤ ਹੈ ਹੂੰ ਦੁਆਰਾ ਬ੍ਰਹਮ ਪਛਾਣ ਲਿਆ ਆਪਣਾ ਮੂਰ ਪਛਾਣ ਲਿਆ ਕਾਦ ਪਛਾਣਿਆ ਕਿ ਤੇਰਾ ਜਨਮ ਹੋਇਆ ਇੱਕ ਹੋ ਗਿਆ ਇਹ ਕੋ ਕੇ ਜਾ ਉਹ ਗਿਆ ਜੇ ਕੋ ਕੇ ਰਹਿ ਗਿਆ ਤਾਂ ਅਤਮ ਦਰਸ਼ਕ ਹੋਇਆ ਤੇ ਆਪਣਾ ਪਛਾਣਿਆ ਹੂੰ ਜਿਹੜਾ ਆਪਨੀ ਪਛਾਣ ਨਾਲ ਬੋਰਾ ਹੁੰਦਾ ਸੋ ਬੋਰਾ ਜੋ ਆਪ ਨੂੰ ਪਛਾਣ ਲੈ ਹੂੰ ਵੀਰ ਕਹਿੰਦਾ ਕਹਿੰਦਾ ਮੈਨੂੰ ਬੋਰਾ ਦਾ ਤੁਸੀਂ ਕਹੀ ਜਾਓ ਮੈਂ ਤਾਂ ਬੋਰਾ ਨੇ ਬੋਰਾ ਕੀਤਾ ਗੱਲਾਂ ਬੋਰੀਆਂ ਜੀਆਂ ਨਗਦੀਆਂ ਤੁਹਾਨੂੰ ਤੁਸੀਂ ਬੋਰੇ ਨੂੰ ਕਿਉਂਕਿ ਬੋਰਾ ਉਹ ਹੁੰਦਾ ਜਿਹਨੇ ਆਪਣਾ ਆਪਨੀ ਪਛਾਣ ਲਈ ਠੀਕ ਹੈ ਪਛਾਣ ਲੈ ਜੇ ਉਹ ਆਪ ਪਛਾਣਦਾ ਹੋ ਰਬੇ ਜਾਣੇ ਉਹ ਰਾਮ ਨੂੰ ਜਾਣੇ ਹੂੰ ਹੂੰ ਫਿਰ ਉਹਨਾਂ ਆਪ ਦਾ ਪਤਾ ਹੈ ਤਾਂ ਤੁਸੀਂ ਆਪ ਦਾ ਬ੍ਰਹਮ ਨੂੰ ਪਛਾਣ ਲਿਆ ਤੱਲ ਜੋੜ ਕਰ ਹਾਂ ਕੱਲ ਕੱਲ ਭਾ ਕੱਲ ਭੱਟ ਹਾਂਜੀ ਆ ਕੱਲ ਜੋੜ ਕੇ ਜਸ ਬਖਾੜਿਓ ਇਸ ਕਰਕੇ ਕੱਲ ਪੱਛਦੇ ਆ ਦੋ ਹੱਥ ਜੋੜ ਕੇ ਇਹ ਜਸ ਤੇਰਾ ਜਸ ਦੇ ਨਾਲ ਬਰਮ ਪਛਾੜ ਲਿਆ ਇਹ ਤੇਰਾ ਜਸ ਐਨਾ ਤੇਰਾ ਹੂੰ ਹੂੰ ਪਛਾਣਿਆ ਵੀ ਤਾਂ ਪਛਾੜ ਲਿਆ ਹੂੰ ਹੂੰ ਜਸ ਐ ਤੇਰਾ ਕਿ ਜਿਹੜੇ ਸਾਭਸੀ ਵਾਲੇ ਅਰਥ ਨੇ ਉਹ ਇੱਕ ਵਾਰ ਰਣਜੀਤ ਸਿੰਘ ਜੋ ਢੰਡੀਆਂ ਤੋਂ ਤਾਂ ਧਾਰ ਨਹੀਂ ਹੁੰਦਾ ਨਹੀਂ ਗੁਰਮਤ ਦਾ ਉਹ ਕਹਿੰਦੇ ਨਹੀਂ ਜੀ ਨਹੀਂ ਆਹ ਉਹਨਾਂ ਨੇ ਫਿਰ ਪ੍ਰਮਾਣ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਜਿਹੜੇ ਆ ਜਨਮ ਤੋਂ ਹੀ ਸੀਗੇ ਉਹਨਾਂ ਨੂੰ ਬਿਲਕੁਲ ਹਾਂ ਕੀ ਨੀ ਨੀ ਪਰਫੋਰਮੈਂਸ ਦਿੱਤਾ ਇਹ ਪ੍ਰੋਫੈਸਰ ਦਰਸ਼ਨ ਸਿੰਘ ਨੇ ਨਾ ਦਿੱਤਾ ਪ੍ਰਮੋਡੂ ਹੂੰ ਜੀ ਚਾਹ ਤਾਂ ਸਾਡੇ ਕੋਲ ਇੱਕ ਪੁਕਤੀ ਆ ਹੂੰ ਪੁਲੀ ਹੀ ਫਿਆ ਮੈਂ ਫੇਰਾਂ ਲੋਕ ਕਹਿਣ ਸਰਵੇ ਹੋ ਸਕਦਾ ਹੂੰ ਤਾਂ ਜਿਹੜਾ ਉਹ ਜਰੂਰ ਬਚਾ ਆ ਦਰਕਾਰਦੂਨੀ ਮਾਰੀਆ ਮਤ ਕੋ ਰਾਗੀ ਉਹ ਹਾਂ ਉਹ ਕਿਹੜਾ ਵਿਚਾਰਾ ਉਹ ਕਿਹੜਾ ਵਿਚਾਰਾ ਗੁਰਬਾਣੀ ਦੇ ਅਰਥ ਜਾਣਦਾ ਉਹਨੇ ਅਰਥਾ ਤੇ ਕੀ ਲੈਣ ਉਹ ਤਾਂ ਹੈ ਸ਼ਬਦ ਗੁਰੂ ਦੁਰਦੁਰ ਜੇਲਾ ਹਾਂ ਇਹਨੂੰ ਕੋਈ ਹੁੰਦਾ ਸਿੱਖ ਚਾਹ ਜੋ ਮਰਦੀ ਕਿ ਇਹ ਜਿਹੜੇ ਨਾ ਦਰਸ਼ਨਸੂ ਵਰਗੇ ਇਹ ਉਲਟ ਪ੍ਰਚਾਰ ਹੈ ਹਿੰਦੂਵਾਦ ਦਾ ਪ੍ਰਚਾਰ ਹੈ ਜਿਹੜਾ ਉਹ ਕਰਦੇ ਨੇ ਦਰਸ਼ਨਸੰਦਾ ਪ੍ਰਚਾਰ ਹਿੰਦੂਵਾਦ ਦਾ ਗੁਰਮਤ ਦਾ ਪ੍ਰਚਾਰ ਹੈ ਠੀਕ ਹੈ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਆ ਹਾਂ ਜਨ ਕੋ ਪਾਇਆ ਹਾਂ ਭਗਤੀ ਜੋਗ ਦੇ ਪ੍ਰਚਾਰ ਵਾਸਤੇ ਹਾਂ ਭਗਤੀ ਜੋਗ ਪ੍ਰਗਟ ਕਰਨ ਵਾਸਤੇ ਹਾਂ ਹਾਲ ਦੇ ਜਨ ਕੋ ਵਾਲਾ ਪੈਦਾ ਕਰਦਾ ਹਾਂ ਜਨ ਵਾਲਾ ਹਾਂ ਤੋਂ ਸੋਈ ਜਾਣਿਆ ਇਹ ਤੋਂ ਪੱਤਰ ਦੇ ਬਾਝਾ ਜਾਣੇ ਉਹਨੇ ਹਾਂ ਹਾਂ ਜਾਣ ਉਹਨੇ ਜਨਮ ਦੇ ਵਿੱਚੇ ਜਾਣੇ ਉਹ ਜਿਹੜਾ ਪਹਿਲਾਂ ਹੀ ਜਾਣਦਾ ਸੀ ਜੇ ਉਹ ਨੂੰ ਜਾਣਖਰੀ ਕਿਹਾ ਜਾ ਸਕਦਾ ਠੀਕ ਹੈ ਕਿਉਂਕਿ ਜਾਣਕਾਰੀ ਡੈਫੀਨੇਸ਼ਨ ਹੈ ਜਾਣਕ ਸੋਚਣ ਇਹਨਾਂ ਜਾਣ ਲਿਆ ਉਹ ਜਾਣਕ ਹਾਂ ਯਾ ਕੋ ਉਪਾਇੋ ਜਿਹੜਾ ਜਨਪਦਾਰਤ ਜਦ ਮਿਲਦਾ ਉਹ ਪੈਦਾ ਹੁੰਦਾ ਉਹ ਜਨਕ ਹੁੰਦਾ ਜਨਕ ਕਹਿੰਦੇ ਨੇ ਹੂੰ ਹੂੰ ਆ ਜਦ ਜਨਪਦਾਰਤ ਮਿਲਦਾ ਨਾ ਉਹ ਜਿਹੜਾ ਉਹ ਜਨਕ ਨਾ ਜਨਕ ਕਹਿੰਦੇ ਨੇ ਇਹ ਜਨਕ ਕਹ ਹੁੰਦਾ ਠੀਕ ਹੈ ਜੀ ਕਿਆ ਕਰ ਆਜੋ ਉਹ ਵਿਆਖਾਰੀ ਜਿਹੜਾ ਸਰੀਰ ਉਹਨੂੰ ਉਤਾਰ ਹੁੰਦੇ ਫੇਰ ਵੀ ਬਤਾਰ ਹੋ ਛਾਉ ਦਾ ਬਰਾ ਬਰਾ ਜੀਵ ਨਾ ਫਿਰ ਬੋਲਣਾ ਹੋਈ ਹੋਈ ਭਗਤੀ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸੀਓ ਹਰ ਰਸਨ ਵਸਾਇਓ ਸ਼ਬਦ ਗੁਰੂ ਪਰ ਕਸ਼ ਦੇਖੋ ਪ੍ਰਕਾਸ਼ ਆਇਆ ਸਿਰਫ ਪੱਤਨਾ ਵਾਰ ਪ੍ਰਕਾਸ਼ ਲਿਖਿਆ ਹੂੰ ਪ੍ਰਕਾਸ਼ ਲਿਖਦੇ ਰਹੇ ਇਹਦਾ ਜ ਵੀ ਇਥੇ ਪ੍ਰਕਾਸ਼ ਦਾ ਮਤਲਬ ਅਦਰੇ ਪ੍ਰਕਾਸ਼ ਆਤਮ ਪ੍ਰਕਾਸ਼ ਲਿਖਿਆ ਸਾਡੇ ਹੂੰ ਇਹਦੇ ਪ੍ਰਕਾਸ਼ ਲਿਖ ਦਿੱਤਾ ਹੂੰ ਹੂੰ ਪਰ ਸ਼ਬਦ ਗੁਰੂ ਨਾਲ ਲਿਖ ਦਿੱਤਾ ਹੂੰ ਹੂੰ ਇਹਦਾ ਮਤਲਬ ਕੋਈ ਬਾਹਲਾ ਪ੍ਰਕਾਸ਼ ਨਹੀਂ ਆਇਆ ਇਹ ਹੂੰ ਹੂੰ ਸ਼ਬਦ ਸ਼ਬਦ ਨੂੰ ਉਕੜ ਹੈ ਹਾਂਜੀ ਗੁਰੂ ਆਡਾ ਸ਼ਬਦ ਆਡਾ ਸ਼ਬਦ ਗੁਰੂ ਇਕੱਲਾ ਸ਼ਬਦ ਨਹੀਂ ਆਇਆ ਇਹ ਸ਼ਬਦ ਨੂੰ ਉਕੜ ਹੋਣਾ ਤੁਹਾਡੇ ਕੋਲ ਵੀ ਹਾਂਜੀ ਸ਼ਾਬਦ ਜਿਹੜਾ ਸੀ ਉਹ ਉਪਦੇਸ਼ ਹੈ ਇਹਨੇ ਗੁਰੂ ਪ੍ਰਕਾਸ਼ਿਓ ਗੁਰੂ ਦਾ ਗਿਆਨ ਗੁਰੂ ਦਾ ਜਾਣ ਕੀਤਾ ਗਿਆਨ ਗੁਰੂ ਉਹ ਹੈ ਜਿਹੜਾ ਪੂਰੇ ਦਾ ਪੂਰਾ ਤੇਰਾ ਜਿਹੜਾ ਉਪਦੇਸ਼ ਹੈ ਉਹ ਗਿਆਨ ਗੁਰੂ ਦਾ ਜਾਣਨ ਕੀਤਾ ਗਿਆਨ ਗੁਰੂ ਸੀ ਜਿਹੜਾ ਉਹਦਾ ਜਾਣ ਹੋਇਆ ਉਹ ਤਾਂ ਜੈ ਜੈ ਨਹੀਂ ਗੁਰਬਾਨੀ ਹੈ ਹੂੰ ਇਹਦੇ ਵਿੱਚ ਗਿਆਨ ਗੁਰੂ ਹੈ ਹੂੰ ਉਹਦਾ ਹੀ ਗਿਆਨ ਹੋਣਾ ਅੰਦਰ ਹੂੰ ਇਹਦਾ ਮਤਲਬ ਹੈ ਕਿ ਜੋ ਗੁਰਬਾਨੀ ਸੀ ਜੋ ਉਪਦੇਸ਼ ਦਿੱਤਾ ਹਰ ਰਾਮਦਾਸ ਨੇ ਪੰਜਾਬੀ ਭਾਸ਼ਾ ਨੂੰ ਉਹਦਾ ਜੋ ਗਿਆਨ ਉਹਨਾਂ ਨੇ ਸਮਝਿਆ ਜੋ বুঝਿਆ ਉਹਦੇ ਨਾਲ ਪ੍ਰਕਾਸ਼ ਹੋਇਆ ਉਹ ਆਪ ਵੀ ਕਹਿੰਦੇ ਨੇ ਅਨੇ ਸੋਧਤ ਸੋਧਤ ਸੋਧਤ ਸੀ ਗਿਆ ਗੁਰ ਪ੍ਰਸਾਦ ਤੱਤ ਸਭ 부ਝਿਆ ਤੁਸੀਂ ਨਾਲ ਜਾਵ ਲਿਖਦੇ ਰਹੇ ਹੋ ਹੂੰ ਜੇ ਗੁਰ ਪ੍ਰਸਾਦ ਤੱਤ ਸਭ 부ਝਿਆ ਲਿਖਦੇ ਨੇ ਤਾਂ ਜਨਮ ਤੋਂ ਪਹਿਲਾਂ ਹੀ ਕਿਵੇਂ ਕਹਿ ਸਕਦੇ ਅਸੀਂ ਵੀ ਉਹਨਾਂ ਨੂੰ ਗਿਆਨ ਸੀ ਠੀਕ ਹੈ ਉਹ ਤਾਂ ਆਪਣੇ ਕਹਦੇ ਨੇ ਹੂੰ ਜਦੋਂ ਜਦੋਂ ਤਾਂ ਪਿਆ ਸੀ ਉਹਨੂੰ ਇਹ ਪਤਾ ਹੀ ਨਹੀਂ ਹੂੰ ਇਹਦਾ ਹਲਾ ਉਹਨੂੰ ਗੁਰਬਾਣੀ ਦੀ ਉਹਨੇ ਪੜੀ ਨਾਲ ਦੇ ਹੱਦ ਹੈ ਉਹ ਗੁਰਬਾਣੀ ਤੁਸੀਂ ਸੂਰੀ ਸਾਹਿਬ ਦਾ ਪੜ੍ਹ ਕੇ ਦੇਖੋ ਆਪ ਕੀ ਲਿਖਦੇ ਨੇ ਆਪਣੀ ਹਮਮ ਕਹਿੰਦੇ ਖੋਜਤ ਖੋਜਤ ਤਤ ਵਿਚਾਰਿਓ ਹਮ ਖੋਜਤ ਖੋਜਦੇ ਖੋਜਦੇ ਨੇ ਤਤ ਸਾਰਾ ਵਿਚਾਰਿਆ ਨੇ ਸੋਧਤ ਸੋਧਤ ਸੋਧਤ ਸਿੱਧਿਆ ਗੁਰ ਪ੍ਰਸਾਦ ਨਾ ਸਾਰਾ ਤਤ ਬੁੱਝ ਲਿਆ ਬਰਬਾਹ ਤਾਂ ਸਭ ਹੋ ਗਿਆ ਇਹਦਾਂ ਤਾਂ ਉਲਟ ਗੱਲ ਉਹਨੇ ਕਿਹਾ ਕਿ ਹੂੰ ਹੂੰ ਕਿਹੜਾ ਜੀ ਜੋਂ ਦੀ ਐਸਾ ਦਾੜ ਤੇ ਗੱਲ ਹੈ ਰਾਰ ਹੈ ਸਾਡੇ ਕੋਲ ਕਹਿਣ ਦਾ ਉਹ ਆਪਣੀ ਗੱਲ ਕਰਦੇ ਸੀ ਉਹਨਾਂ ਦੇ ਨਹੀਂ ਕਿ ਗੁਰੂ ਜੀ ਨਹੀਂ ਉਹ ਕਹਿੰਦੇ ਸੀ ਕਿ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਨਹੀਂ ਗੁਰਮਤਿ ਦਾ ਪਤਾ ਸੀ ਮੈਂ ਤਾਂ ਸਿੱਖੀ ਹੈ ਬਾਅਦ ਚ ਐ ਉਹ ਕਹਿੰਦੇ ਸੀ ਠੀਕਾ ਇਹ ਸਾਰੇ ਠੀਕਾ ਉਹਨੇ ਆਪਣੀ ਕਹਾਣੀ ਜਾਈ ਕੀਤੀ ਹੈ ਹੂੰ ਠੀਕਾ ਉਹਨੇ ਆਪਣੀ ਪਰ ਉਹ ਕਹਿੰਦੇ ਵੀ ਬਚਪਨ ਤੋਂ ਅਚਾ ਉਹਨੇ ਫਿਰ ਪੰਜਵੇਂ ਪਾਸ਼ਾ ਜੀ ਕਹਿੰਦਾ ਮੈਨੂੰ ਹਾਂ ਵੀ ਉਹ ਕਹਿੰਦੇ ਹਰੇਕ ਬਾਤ ਚ ਸਿੱਖ ਰੋਗਨ ਤੁਸੀਂ ਗਲਤ ਤੋਂ ਪੰਜਵੇਂ ਜਨਮ ਤੋਂ ਹੀ ਸੀ ਐਂ ਗੱਲ ਸੀ ਉਹ ਗੱਲ ਫਿਰ ਹੋਈ ਕਹਿੰਦੀ ਨਾ ਮੈਂ ਹਰੇਕ ਸਿੱਖਦਾ ਯਾਰ ਜੀ ਸੋ ਹਰੇਕ ਦਾ ਕਿਹਾ ਬੰਦਾ ਆ ਗਿਆ ਨਾ ਹੂੰ ਹੂੰ ਯਾਰ ਰਜੀਤ ਸਾਹਿਬ ਹਰੇਕ ਨਹੀਂ ਗੱਲ ਕੀਤੀ ਤਾਂ ਗੁਰੂ ਨਾਨਕ ਤੇ ਲੈ ਕੇ ਸਾਰੇ ਵਿੱਚ ਆ ਗਏ ਨਾ ਭਗਤ ਠੀਕ ਹੈ ਜੀ ਇਹ ਗੱਲ ਕੀ ਹੈ ਹੂੰ ਕੁਰਬਾਨੀ ਸਾਰੀ ਗੱਲ ਸਾਬਤ ਹੁੰਦੀ ਹੂੰ ਹੂੰ ਹਾਂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਹਾਂ ਗੁਰੂ ਨਾਨਕ ਅੰਗਦ ਅਮਰ ਲਾਗ ਗੁਰੂ ਨਾਨਕ ਅੰਗਦ ਅਮਰ ਇਹ ਲੱਗੇ ਤਿੱਡੇ ਜੁੜੇ ਹੂੰ ਹੂੰ ਇਹਦੇ ਨਾਲ ਬਰਬਾਹ ਜੁੜੇ ਅੰਗਦ ਦਾ ਘਨ ਜੁੜਿਆ ਪਹਿਲਾਂ ਅਨੰਦ ਗੁਰੂ ਸਮਝਾਈ ਉਹ ਨਾਲਕਨ ਜੁੜਿਆ ਉਹਨੇ ਉਹ ਨੂੰ ਸਮਝਾਇਆ ਹਮਮ ਅਮਰਦਾਸ ਸੁਖਸਾਧਨ ਨੇ ਅਮਰਦਾਸ ਨੂੰ ਸਮਝਾਇਆ ਹਮ ਕੁਰਬਾਨੀ ਉਹ ਜਿਹੜੀ ਪਹਿਲੀ ਵਾਰਤ ਸੀ ਉਹ ਛੜਾਈ ਦੂਜੀ ਵਾਰ ਆ ਛੜਿਆ ਪਹਿਲਾ ਰੰਗ ਉਤਾਰਿਆ ਹਮ ਹਮ ਕਿਵੇਂ ਅੰਗ ਦਾ ਦਾ ਤਾਰਿਆ ਨਾਲ ਕਰਨੇ ਨੂੰ ਉਪਰਾਂ ਕੋਈ ਰੰਗ ਨਹੀਂ ਛੜਿਆ ਇਹ ਗੱਲ ਠੀਕ ਹੈ ਉਹਨਾਂ ਨੇ ਸਤਿਗੁਰੂ ਇੱਕ ਵਾਰ ਮਤ ਹੈ ਕਿਤੇ ਪੜੀ ਹੈ ਚਾਹੇ ਵਕਤਮਾਨੀ ਪੜੀ ਹੋਵੇ ਉਹਨਾਂ ਨੂੰ ਸਿੱਧਾਰਨ ਚੜੇ ਪਹਿਲਾਂ ਕੋਈ ਮਤ ਕਰਾਨ ਨਹੀਂ ਕੀਤੀ ਠੀਕ ਇਹ ਗੱਲ ਠੀਕ ਕਬੀਰ ਨੇ ਕਰ ਲਈ ਸੀ ਇਸੇ ਤਾਂ ਨਹੀਂ ਆਈ ਉਹਨੇ ਪਹਿਲਾਂ ਕੋਈ ਮਤ ਕਰਾਨ ਕੀਤੀ ਹੀ ਨਹੀਂ ਹੂੰ ਹੂੰ ਤੇ ਦੀਪਕ ਤੋਂ ਵੱਡ ਲਈ ਸਭ ਚੱਲ ਗਈ ਹੂੰ ਉਹ ਗੁਰਨਾਣ ਕਵਰ ਦੀ ਬੁੱਧੀ ਕਿੱਡਾ ਸਾਰਿਆਂ ਦੀ ਹੋ ਇਹ ਗੱਲ ਅਲੱਗ ਹੈ ਇਹ ਗੱਲ ਵੱਖਰੀ ਗੱਲ ਹੈ ਕਿ ਉਹ ਬੁੱਧੀ ਤਾਂ ਉਹੀ ਸੀ ਪਰ ਉਹਨੂੰ ਉਹ ਹੀ ਗੱਲ ਹੈ ਨਾ ਹੋਰ ਠੀਕ ਹੈ ਜੀ ਹਾਂ ਇੱਥੇ ਆ ਕੇ ਭਗਤ ਬਾਣੀ ਵੀ ਸਮਝ ਕਿਉਂਕਿ ਸ਼ਬਦ ਗੁਰੂ ਸੰਤ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਹਾਂ ਉਹਨਾਂ ਨੇ ਤਾਂ ਗੁਰਦੈਨ ਨਾਲ ਨਾਨਕ ਨਾਲ ਜੁੜਿਆ ਅਬਦਲ ਨਾਲ ਜੁੜਿਆ ਹਾਂ ਜੀ ਇਹਨਾਂ ਨੂੰ ਤਾਂ ਉਪਦੇਸ਼ ਕਰਨਾ ਪਿਆ ਹੂੰ ਕਾਰਗੋਰ ਰਾਮਦਾਸ ਗੁਰ ਅਰਜਨ ਕਾਰਗੋਰ ਰਾਮਦਾਸ ਹੂੰ ਰਾਮਦਾਸ ਦਾ ਜਿਹੜਾ ਸੀ ਨਾ ਰਾਮਦਾਸ ਦੇ ਜਿਹੜਾ ਅਰਜਨ ਦਾ ਜਨਮ ਹੋਇਆ ਇਹਨੂੰ ਉਪਦੇਸ਼ ਗੱਲਾਂ ਨਹੀਂ ਪਿਆ ਹੂੰ ਹੂੰ ਇਹਨੂੰ ਰੰਗ ਦੀ ਚੋਅ ਚੱਲਿਆ ਸਿੱਧਾ ਹੀ ਕੋਲ ਦੁੱਤਰੇ ਹੂੰ ਹੂੰ ਇਹ ਗੱਲ ਪਹਿਲਾਂ ਆਲਰੇਡੀ ਹੀ ਚੱਲਦੀ ਹੈ ਹੂੰ ਹੂੰ ਜਿਵੇਂ ਘਰੂ ਪੰਨਾਲਾ ਨੂੰ ਬਚਪਨ ਤੋਂ ਮਿਲਿਆ ਨਾ ਹੂੰ ਹੂੰ ਬਚਪਨ ਦੀ ਗੱਲ ਸੁਣ ਲਈ ਰਾਮਦਾਸ ਨੇ ਤਾਂ ਖੈਰ ਬਚਪਨ ਤੋਂ ਇੰਨੇ ਛੋਟੇ ਤੋਂ ਨਹੀਂ ਸੀ ਜੁੜੀ ਉਹ ਤਾਂ ਥੋੜਾ ਜਿਹਾ ਉਹਨੇ ਧਾਰਨ ਕੀਤੀ ਸੀ ਇਹ ਬਿਲਕੁਲ ਘਰ ਦੇ ਵਿੱਚ ਸੀ ਹਮਮ ਇਹ ਮਤ ਘਰ ਦੇ ਵਿੱਚ ਸੀ ਉਹਦੇ ਆਪਣੇ ਘਰ ਚ ਮਤ ਨਹੀਂ ਸੀ ਰਾਮਦਾਸ ਦੇ ਹਾਂ ਰਾਮਦਾਸ ਦਾ ਤਾਂ ਉੱਥੇ ਰਹਿੰਦੇ ਸੀ ਘਰ ਤਾਂ ਅਲੱਗ ਸੀ ਉਹਨਾਂ ਦਾ ਹੂੰ ਹੂੰ ਇਹ ਘਰ ਦੇ ਵਿੱਚ ਹੀ ਆ ਪਹਿਲਾਂ ਠੀਕ ਹੈ ਹਾਂ ਇਸ ਘਰ ਤੇ ਭਗਤ ਸਿੱਧਾ ਹੀ ਉਤਰਿਆ ਉਹ ਭਗਤੀ ਸਿੱਧੀ ਉਤਰਿਆ ਹੀ ਇਹ ਪਿਆ ਇਹਨਾਂ ਨੂੰ ਵਤ ਦੇਣੀ ਹੂੰ ਘਰ ਦਾ ਭਾਵ ਉਹਨਾਂ ਦੇ ਘਰੇ ਆਏਗਾ ਨਾ ਹੁਣ ਇਹ ਦੁਨਿਆਵੀ ਘਰ ਦੀ ਗੱਲ ਹੋਗੀ ਨਾ ਆ ਸਰ ਸਾਰੀ ਹੂੰ ਹੂੰ ਮਰ ਭਗਤ ਲਿਖਿਆ ਹਾਂਜੀ ਹਾਂ ਗੁਰੂ ਗੁਰ ਲਿਖਿਆ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉਤਰਾਇਓ ਇਹਦਾ ਗਿਆਨ ਦਾ ਨਾ ਹਾਂ ਠੀਕ ਹੈ ਉਹ ਭਗਤ ਉਤਰਾਇਓ ਮਤਲਬ ਆ ਨੂੰ ਬਈ ਪੜਾਉਣਾ ਨਹੀਂ ਪਿਆਸ ਤਾਂ ਇਸ ਲਈ ਬਈ ਬੜੇ ਬੁਢਿਆਂ ਨੂੰ ਪੜਾਇਆ ਕਿ ਉਹ ਵਿਦੇਸ਼ੀ ਇਹ ਨਹੀਂ ਕੋਈ ਕਹਾਣੀ ਨਹੀਂ ਠੀਕ ਹੈ ਜੀ ਸੀ ਜੀ ਸੁਣਦੇ ਸੀ ਉਹਨਾਂ ਨੇ ਕਿਹਾ ਕਿ ਜੇ ਹੋਰ ਸਕੂਲ ਚ ਲਾਇ ਨਹੀਂ ਪੜ੍ਹ ਨੂੰ ਚਲਾਉਂਦੇ ਨੇ ਪੜ੍ਹ ਨੂੰ ਚ ਸਦੇ ਜੀ ਇਹ ਬੜਾ ਸਕੂਲ ਹੋਰ ਕੀ ਹੂੰ ਇਹ ਬੜੀ ਕੀ ਹੋਊਗੀ ਅਸੂਰਿਸ ਚਾਹਤ ਜੀ ਬੰਦੇ ਤੇ ਸਾਰੇ ਸੁਣਦੇ ਤੇ ਕੋਈ ਮੰਨੂ ਕੋਈ ਨਾ ਮੰਨਦਾ ਕੋਈ ਕਿਛਾ ਨਹੀਂ ਇਹ ਬੰਨਣਾ ਕੋਈ ਨਹੀਂ ਜੀ ਨਾ ਮੰਨਣਾ ਮੰਨ ਲੜਦਾ ਕਹੇ ਤਾਂ ਕੋਈ ਨਹੀਂ ਬੁੱਧਾ ਹੈ ਜਾਂਦੀ ਗੱਲ ਦਰਗਾਹ ਸਾਰੀ ਗੱਲ ਇੱਥੇ ਪਹਿਲਾਂ ਦਰਗਾਹ ਠੀਕ ਹੈ ਜੀ ਇੱਥੇ